ਉਸ ਤੋਂ ਦੀ ਨਾਲ ਕਰਨੇ ਰੰਕਾਰ ਕਰਮਨ ਮੇਰੇ ਸਤਿ ਵਿਵਹਾਰ ਉਸ ਸਤਿ ਮਾਨ ਹੈ ਕਰਨੇ ਰੰਕਾਰ ਬੰਦ ਤੇ ਵਿੱਚ ਜੇ ਇੱਕ ਦਾ ਬੰਨੀ ਗੱਲ ਉਸ ਤੋਂ ਦੀ ਕਰਦੀ ਬੰਦ ਕਰਦੀ ਸਭ ਦੇ ਦੀ ਕਰਦੀ ਜੇ ਨਰੰਕਾਰ ਦੀ ਕਰੇ ਜਿਹੜਾ ਵਿਅਕਤੀ ਹੈ ਨਾਕਾਰ ਹੈ ਉਹਦੀ ਜੇ ਸ੍ਰੀ ਰੰਕਾਰ ਦੀ ਕਰੇ ਵਿੱਚ ਆ ਗਏ ਜਿਆ ਫਰੰਕਾਰ ਦੇ ਉਸ ਦਾ ਧਿਆਨ ਸੱਚ ਖਾਂ ਵਸੇ ਨਜ਼ਰ ਦਾ ਫਿਰ ਹੰਕਾਰ ਸਾਰੇ ਬਿਚਾਗੇ ਇਹ ਵੀ ਹੰਕਾਰ ਇਹ ਵੀ ਵਿੱਚੇ ਆ ਗਿਆ ਉਹ ਦੀ ਇੱਕ ਤਾਂ ਹੰਕਾਰ ਆ ਇੱਡੀ 'ਚ ਬੈਠੇ ਨੇ ਜਿਹਨਾਂ ਦੀ ਛਿੜਤੀ ਕਰੇ ਵੀ ਸਕਦੇ ਇੱਕ ਤਾਂ ਇੱਕ ਬੈਠਾ ਉਹ ਵੀ ਸਾਇਆ ਰੂਪ 'ਚ ਉੱਥੇ ਅਸਲੀ ਬੈਠੇ ਨੇ ਇੱਥੇ ਨਕਲੀ ਸਾਇਆ ਇਹਦੇ ਵਿਚਈ ਆ ਜਾਉਂ ਅੱਜ ਅਸਲੀ ਪਰਛਾਇਆ ਹੈ ਇਹ ਨਕਸ਼ਾ ਹੀ ਨਕਸ਼ਾ ਦਿਖਾਉਂਦਾ ਥਰੀ ਅਸਲ ਨਕਸ਼ਾ ਜਿਹੜਾ ਬਣਦਾ ਹੈ ਉਹੀ ਉਹੀ ਬਣਦਾ ਜੀ ਦਾ ਹੈ ਹਲਤਾ ਹੀ ਘੜੂਦਾ ਦੂ ਇਹ ਤਾਂ ਬਾਣੀ ਨਾ ਤਾਂ ਇਹ ਕਿਹਾ ਮਨੁੱਖੀ ਤੇ ਇੱਕ ਇਹ ਬਾਦੂਖ ਜਿਹੜਾ ਹੈਗਾ ਅਸਲੀ ਪੇਟ ਨਹੀਂ ਹੈ ਇਹ ছায়ਾ ਹੀ ਕੋਈ ਮਰ ਲਾ ਬਿਲਣਾ ਉਥੇ ਇਹ ਕਰਕੇ ਆਨਿਓ ਰੱਖੋ ਲੈਣ ਬੜੇ ਸੋਏ ਸੋਏ ਸੋਏ ਆ ਜੋ ਕੁਰਬਾਨ ਚਾਏ ਇਹਦੇ ਇਕ ਕਰਨ ਨਾ ਲੱਗ ਨਾ ਕੋਈ ਬਣ ਲੱਗ ਹਾਂ ਉਸਤ ਦੀ ਬਨਵਾ ਕਰਨ ਅਲੰਕਾਰ ਕਰ ਮੰ ਮੇਰੇ ਸਤਿ ਸੋਏ ਸਰ ਆ ਉਸਕੀ ਦਰਦਾਰ ਵੀ ਕਰਨੀ ਹਾਂ ਦਰਕਾਰ ਦੀ ਸ਼ਰੀਰ ਦੀ ਨਹੀਂ ਕਰਨੀ ਉਹ ਜਿਸ ਦੀ ਉਹ ਉਸਤਤੀ ਹੋ ਲਈ ਹੈ ਸਰੀਰ ਕਰ ਕਹਤੇ ਨੇ ਲੱਭੜੇ ਬਾੜ ਉਹ ਹੈ ਉਹ ਸਰੀਰ ਨਹੀਂ ਮੰਨੀ ਸਰੀਰ ਨਹੀਂ ਹੈ ਉਹ ਇਹਨਾਂ ਨੇ ਉਸਤਤੀਆ ਦਿੱਤੀ ਵੀ ਦਾਕਾਰ ਦੀ ਉਹ ਕੱਟਾ ਗਦਾ ਤਰਸੂ ਰਸ ਸੰਕ ਸਦਾ ਸੰਵਾਣ ਚੱਕਰ ਬੱਕਰ ਕਰਮ ਲਈ ਜਿਵੇਂ ਗ੍ਰੀਸ਼ਵਰੇਤ ਭਾਗ ਜਿਹੜਾ ਦੀ ਉਸਤਤੀ ਹੈ ਉਹ ਉਹ ਤੀਰਿਓ ਉਸਦਾ ਹੈ ਗੁਰਮੁਖੀ ਉਸਦਾ ਹੈ 14 ਨੇ ਤਾਂ ਉਹ ਇੱਕ عورت ਬਣਾ ਕੇ ਆਇਆ ਜੀ ਕਾਸ਼ਾ ਬਹਾਲਾ ਦਿਖਾਤਾ ਤਸੂਰ ਬਣਾ ਕੇ ਪਾਤਾ ਸੋ ਸਭਾਲਾਤ ਸਮਾਂ ਵੀ ਸੰਗ ਭਾਲ ਡੁਪਲੀਕੇਟ ਕਰਤਾ ਉਹ ਸੰਗ ਜਿਹੜਾ ਇਸ ਦਾ ਨਾਮ ਰਤ ਕਾਂਠੇ ਭਰੋਏ ਸੰਕਰ ਕਾਂਠੇ ਜੀ ਵਿਦਿਆ ਬਾਹਰ ਆਉਣਾ ਇਹ ਤਾਂ ਇਹ ਤਾਂ ਸਭ ਹੋ ਗਿਆ ਆ ਚੰਨੇ ਜਿਹੜੇ ਨੇ ਜੇ ਲੋਜੋ ਤੂੰ ਸੋਤੋ ਇਹਨਾਂ ਚੰਨਾ ਜੇ ਤਾਂ ਦਾ ਕਠਾ ਇਸ ਕੋ ਬਾ ਨਾਮ ਦਾ ਉਹ ਤੇ ਮੰਨਿਆ ਜੇ ਇੱਕ ਨਾਲੇ ਦਬਲੇ ਸਤੇ ਸਿਰਵਾਦ ਨਹੀਂ ਕਰਦੇ ਬਈ ਤੇ ਚੇ ਦਬੇ ਹੋਏ ਨਾ ਤੁਰਨ ਨਾਲੇ ਇੱਕ ਵਾਰ ਜੇ ਨੰਦੀ ਦਾ ਕੋਈ ਆ ਬਾਹਰ ਤੇ ਨੂੰ ਨੇ ਇਹ ਤਰਸੂਲ ਬਣ ਆਇਆ ਤੇ ਨਾਲੂ ਉਹਦੇ ਤੋਂ ਮੂਸਾ ਤੋਂ ਇਹ ਕਰਤਾ ਨਹੀਂ ਜਾ ਲੜਿਆ ਆਏ ਨਹੀਂ ਜਾਣਾ ਉਹ ਉਹ ਹੁੰਦਾ ਉੱਥੇ ਧੂਰ ਨਾ ਜਾਇਆ ਇਹ ਚੀਜ਼ਾਂ ਸਿਆ ਦਰਗਾਹੀ ਆਪਣੇ ਉੱਥੇ ਉੱਥੇ ਉੱਥੇ ਆਪਣੇ ਗੁਰਬਾਣੀ ਦੀ ਹੈ ਇਹ ਗੱਲਾਂ ਸਾਰੀਆਂ ਦਰਗਾਹੀ ਦੀਆਂ ਠੀਕ ਹੈ ਫਿਰ ਤਾਨਾ ਕਰ ਤਾਂ ਕਿਹੜਾ ਆਇਓ ਸ਼ਾਸਕਾਂ ਜਦੋਂ ਹੁੰਦਾ ਵਾਂ ਕੇ ਤਾਨਾ ਦੂ ਗੁਰੂ ਆਪਣਾ ਮਾਇਆ ਘੜੀਆਂ ਨੇ ਬਸ ਆ ਰਖੇ ਹੋ ਨਾ ਬਾਹਰ ਜਿਹੜਾ ਹੈਗਾ ਮਾਇਆ ਦਾ ਰੂਪ ਨਾਮਾ ਵੀ ਬਰੋਲ ਕਿਤੇ ਲੂ ਮਾਇਆ ਦਾ ਅਛਰੀ ਬਣ ਜਾਈਓ ਰਗਾ ਜੀ ਮਛਰਾਂ ਨੇ ਹਾਂ ਨਿਰਮਲ ਰਸਨਾ ਅਮਰਦ ਪਿਓ ਸਲਾ ਸਹਿਲਾ ਕਾਲੇ ਜੀਓ ਕਿਆ ਪਰ ਸ੍ਰੀਣਾ ਨ ਕੋ ਬਾਣੀ ਜੋ ਤਾਰ ਰਸਨਾ ਦਰਵਾਜਾ ਤਕਰਾ ਕੋਈ ਪਤਾ ਕੀ ਕਰ ਦੇ ਲੋ ਜੇ ਕਿ ਸਰ ਲੱਗਦੇ ਕੋਈ ਸ਼ਿਕਾਇਤ ਹੋਏ ਤਾਂ ਪਹਿਲਾਂ ਪੂੜੀ ਕਰਕੇ ਤਬੀ ਚੱਲ ਦੇ ਮੇਰੀ ਰਤਨ ਸਰਵਲ ਹੋ ਗੱਲ ਇੱਥੇ ਦੀ ਜੋੜ ਲਈ ਉੱਤਰ ਮਰਮ ਲਖਨਾਪੁਰ ਸਲਾ ਸਹਿਲਾ ਕਰ ਲੇ ਜੀਓ ਸਦਾ ਸੇ ਅੱਲਾਹ ਕਾਲੇ ਜੀ ਦੁੱਧ ਪਿਲਾਦਾ ਗੱਲ ਦੀ ਜਾਲੀ ਸਾਰੀ ਰੋਜੇ ਭਲਾਈ ਜਾਵੇ ਰੋਟਾ ਕੀ ਉਹਦਾ ਸੇ ਲੱਗੀ ਹੋ ਜੂਏਸ ਕਰ ਕਰ ਸਦਾ ਸਦਾ ਨਰਮ ਕਾਲੀ ਪੁੱਲਲੀ ਕਾਲੀ ਤੇ ਉਬਰਦੋਂ ਪਿਲਾਦਾ ਚਲੋ ਪੜਨ ਜੀ ਕਿ ਆਪੇ ਕਰਕੇ ਉਬਰ ਜਿਆਣੀ ਛੱਡੀ ਅਮਰਦ ਨਾ ਕੋਈ ਇਹ ਤਾਂ ਅਸੂਲਾ ਹੋ ਜੂਗਾ ਜੀ ਇਹੋ ਸਤਿ ਸਿਰ ਇਹ ਅਸਤਰੀ ਕਰੋ ਠੀਕ ਕਰੋ ਜੇ ਇਹ ਰਸਨਾ ਦਾ ਅਰਥ ਬਦਲਦੇ ਆਂ ਤਾਂ ਹਰ ਜਗ੍ਹਾ ਇਹ ਬਦਲੂ ਜੇ ਰਸਨਾ ਦਾ ਅਰਥ ਹੈ ਤੇ ਜੀਵ ਕਰਦੇ ਜੇ ਰਜੀਵ ਕਾਹਨ ਤਾਂ ਤੇ ਛਲਦੀ ਉਹ ਛਦੀ ਵਢੀ ਉਹ ਛਲਦੀ ਜੀ ਜਦੋਂ ਗੁਰੂਆਂ ਦਾ ਅਸਿਨ ਦੇ ਗਏ ਤਾਂ ਤੁਸੀਂ ਐਂ ਵੀ ਗਾ ਲਈਏ ਪ੍ਰੈਕਟੀਕਲੀ ਕੀ ਹੇਰਵੰਦ ਦਾ ਸਮਾਜੇ ਕੋਲਈ ਕਰਕੇ ਕੋਈ ਰਸਾਂ ਸਰਵਨ ਪਵਿੱਤਰ ਕਰਕੇ ਕੋਈ ਅੰਮ੍ਰਿਤ ਛਕਦਾ ਕੋਈ ਹੋ ਜਾਵੇ ਅੰਮ੍ਰਿਤ ਪੀਓ ਜਾਂ ਛਕੋ ਸਦਾ ਸਹਿਲਾ ਕਰ ਲਿਓ ਪੀਓ ਨਾਲ ਸਦਾ ਸਹਿਲਾ ਕਰ ਲਿਓ ਹੋਜੀ ਇਸ ਕੀ ਗੱਲ ਲਿਖਾਇਆ ਤੁਮ ਦੂਰੇ ਘਰ ਸਿਆਰ ਖੜਿਆ ਕੋਈ ਧਿਆਨ ਨਹੀਂ ਦਿੱਤਾ ਕਿ ਇੱਥੇ ਨੇ ਅਰਥੋ ਬਦਲ ਦੇ ਫਰੀਜ ਵੈ ਕੋਈ ਬਦਲ ਦੇ ਉਪਰ ਦੇ ਦਾ ਫਿਕਰ ਠੀਕ ਨੇ ਬਾਹਰ ਲੈਣਗੇ ਜਦ ਤੁਨਸਨਾ ਜੀ ਬਹੁਤੀ ਅਪਰ ਦੀ ਬਾਤ ਲੱਗਦੀ ਜਾਣੀ ਤੇ ਜਾਣੀ ਹੈ ਜੇ ਰਸਾਦੋ ਹੀ ਬਦਲੂ ਕੀ ਬਰ ਬਦਲ ਜਾਣੀ ਜੇ ਤੇ ਕਿਰਦ ਕਿ ਨਾ ਰਸਨਾ ਉਸ ਕਹਿ ਸਕਦੇ ਆ ਜੀਵ ਨੂੰ ਨਾ ਉਹਦੀ ਸ਼ਕਤੀ ਹੁੰਦੀ ਇਹ ਨਾਲੇ ਬੁਣਦੇ ਰਹੇ ਇਹ ਛੱਤੀਆਂ ਹੋ ਤਾਂ ਹੁੰਦੇ ਕਿ ਆਪ ਬਣਾਤਾ ਕਬਰ ਤਾਂ ਹੋਰ ਅਸੈਂਟੀ ਗਲਤੀ ਚਲੀ ਜਾਣੀ ਜੀ ਸਿੱਖਾਂ ਨੂੰ ਘੱਟੋ ਘੱਟ ਚਾਹੀਦਾ ਜੀ ਜੇ ਹਮ ਬੋਲਦਾ ਕਰੋ ਪਰ ਆਪ ਦੀ ਨਹੀਂ ਲੱਗ ਸਕਦੇ ਅਸੇ ਇੱਕ ਮੰਨ ਲੈ ਆਪਣੇ ਰੂਹ ਦਾ ਪਾਇਆ ਹੋ ਐਡਕੀ ਦਾ ਹੈ ਕੀ ਟੌਪਰ ਦੇ ਗ੍ਰਹਣ ਦੇ ਆਉਂਦੀ ਨਹੀਂ ਸ਼ਕਤੀ ਹੋਵੇ ਉਹ ਦੇਖ ਰਿਹਾ ਹੋਰ ਹੈ ਉਪਰਤ ਹੋਰ ਹੈ ਜਿਹੜੇ ਵੈਸੇ ਛੱਤੀ ਛੱਤ ਮਾਰੇ ਨੇ ਜੇ ਬਸਾ ਛੱਤੀ ਉਪਰ ਗਾਏ ਤੇ ਛੱਤੀ ਦਾ ਵੀ ਗਾਵੇ ਕੋਈ ਇਤਿਆਰ ਕੀਤਾ ਸੰਕੀ ਕਹੋ ਛੱਤੀ ਵਾਲਾ ਪਰਮਾਣਾ ਛੱਤੀ ਵਾਲਾ ਪਰਮਾਣ ਨਹੀਂ ਹੈ ਖੱਤੀ ਹੁੰਦਾ ਰਾਜੇ ਤੇ ਸਾਧਰਗੋਰਾ ਤੋਂ ਆ ਨਹੀਂ ਹੁੰਦਾ ਸਖਤੀ ਮੈਦਾਨ ਮਾਰੀ ਸਾਧਰਗੋਰਾ ਤੋਂ ਬਸ ਸਖਤੀ ਵਜਤ ਤਾੜਾ ਦਵਾ ਲਿਆ ਫਿਰ ਇਸਲੀ ਗੱਲ ਤਾਂ ਉਹੀ ਸੀ ਬੜੀ ਹੋਰ ਕੋਈ ਹੋਰ ਜੋ ਕਹਿਣੋਂ ਤੁਸੀਂ ਇੱਕ ਬਹੁਤੀ ਜਾ ਪੱਕਾ ਗੱਲ ਗਾਂ ਜਿਹੀ ਜਿਹੀ ਹੈ ਅੰਮਰ ਛੱਤੀ ਨੇ ਇਹ ਛੱਤੀ ਹੋ ਗਿਆ ਸਾਡੇ ਕੋਲ ਹੁਣ ਕਿਤੀ ਲੋਕਾਂ ਨੇ ਹੋਰ ਗਏ ਪਿੱਛੇ ਹੋਣਗੇ ਹਾਲੇ ਦੇ ਸੱਚੀ ਨਾਲ ਸਾਡੋਂ ਵਰਗੇ ਜਦੋਂ ਦਸ ਪਾਣ ਦੇ ਤਾਈ ਉਹ ਕਿੱਥੇ ਜਾਊਗਾ ਜਦੋਂ ਮਨੋਂ ਹੋਦਾ ਨਹੀਂ ਉਹ ਪਹੌੜਾ ਨਹੀਂ ਹਾਂ ਪਰ ਤਾਂ ਹੀ ਕਰਦੇ ਕਿ ਹੋਰ ਬੁਲਾਓ ਸੱਚੀ ਹੋਵੇ ਸਾਰੇ ਗੰਤ ਬਰਨਦੇ ਤੈਨੂੰ ਪੜਾ ਬਰਨਦੀ ਤੈਨੂੰ ਕਿਦੋਂ ਿਆਰੀ ਸੀ ਤਾ ਫਨਾ ਐਡ ਕਰੋ ਜੇ ਵਰਤ ਹੈ ਜੇ ਉਧਰ ਐਡ ਕਰੋ ਸੱਤੀ ਜਣਾ ਸੱਤੀ ਹੋਣੇ ਕਿਸਾਨੇ ਪੌਲੀਰ ਥਾਲੇ ਜਿਨਨੇ ਪੌੜ ਚਗੀ ਹੋਈ ਉਹਨਾਂ ਵਾਸਤੇ ਪੌਲੀਰ ਥਾਲੇ ਹੈ ਅਜੀ ਕਹਿਣਾ ਉਬਰਦਾ ਐਡ ਕਰੋ ਬਰਾਤਾਂ ਚ 30 ਦੇ ਲਖਣੇ ਵੀ ਹੁਣ 37 ਹੋ ਗਏ 36 ਦੇ ਚੇਤੂਆ ਮਰ ਚੁਕੇ ਆਂ ਕਹਿੰਦੇ ਨਹੀਂ ਸੱਤੀ ਦੀ ਤਾਕਤ ਕਰੂਗਾ ਵਾਸਤੇ ਦੁਨੀਆ ਕੇ ਮਨੂ ਕਈ ਵਿਦਵਾਨ ਜੱਤੀ ਨੇ ਬਾਕੀ ਸੱਤੀ ਦੇਖਾ ਦੇ ਖਾਸ ਦੇ ਸੱਤੀ ਕਹੋ ਨਾ ਜੇ ਮੈਂ ਹੋਰ ਰੌਲੇ ਪਾਉਣੇ ਹੋ ਕੈਲੰਡਰ ਦੇ ਇਹਦਾ ਜੀ ਬੋਲਦੇ ਇਹਦਾ ਕਦੇ ਹੀ ਬੋਲਦੇ ਅਸੀ ਫਲਸਫੀਕਲ ਗੱਲਾਂ ਖੜੀਆਂ ਕਰਦੀਆਂ ਨੇ ਇਹਨਾਂ ਨੇ ਅੰਡ ਵੱਡ ਖੜੀਆਂ ਨਹੀਂ ਕਿਉਂ ਨੇ ਅਸੀਂ ਇਹ ਸਿੱਖੀ ਗਈ ਹੈ ਥੱਲੇ ਇਹਨਾਂ ਸਿੱਖੀ ਹੈ ਸਾਡੇ ਚ ਉਹ ਕਹਿਣ ਵਿੱਚ ਲਓ ਇਹ ਤੇ ਬੱਲੇ ਦੁੱਦਲਾ ਤੁਹੇ ਕਿੱਥੇ ਫੋਰਕੂ ਨਹੀਂ ਲਾ ਗਿਆ ਖੜਵ ਨੂੰ ਜਦ ਪਤਾ ਸੀ ਤਾਂ ਅਸੀਂ ਢੇਘੜ ਦਾ ਉਹ ਤੇ ਜੋ ਪਾਈਪ ਲਾਉਣੀ ਸੀ ਜਹਾ ਕਰਨਾ ਸੀ ਉੱਥੇ ਦੇ ਕੋਈ ਢੇਘੜਾ ਵੀ ਤਾਂ ਪਾਈਪ ਰੋਕ ਲੈਦੇ ਇਹ ਚੋਲੀ ਕੀ ਕਰਨਾ ਇਹ ਤਾਂ ਅਰਧੋਂ ਟੇ ਦੇ ਦੇ ਉਹ ਖੂਜੇ ਚਾਹ ਕੇ ਬਿਤਾ ਦਾ ਲੈ ਰਿਹਾ ਰਮਨੂਪੀ ਡੇਗ ਬਤੀਦਾ ਗਿਆ ਕਿਉਂ ਆਇਆ ਹੈ ਇਹ ਉੱਥੇ ਮੋੜ ਤੇ ਕਿ ਜਿਗੂਏ ਥਲੇ ਨੂੰ ਰੁੜ ਜਾਣਾ ਲਾਤਾ ਉਹਨਾਂ ਪਸੰਦ ਉਹ ਹਾਲਾ ਫੜਾ ਕਰਤਾ ਵੀ ਇੱਥੇ ਆਣਾ ਕਿਥੋਂ ਹੈ ਹਾਲੇ ਜਰਮ ਪੀਓ ਸਦਾ ਸਹਿਲਾ ਕਰ ਜੇ ਨਿਰਮਲ ਬੁੱਧ ਨਾਲ ਕੁਰਬਾਨੀ ਰੂਪੀ ਜਿਹੜਾ ਰਾਖਾਪੁਰਤ ਇਹ ਪੀਲ ਵਿੱਚ ਕੋਈ ਕੁਰਬਾਨੀ ਦਾ ਸੱਚ ਲੱਭ ਲਵੇ ਕੋਈ ਮੁਝਲਵੇ ਕੋਈ ਸਦਾ ਬਾਤ ਇਸੇ ਲੋਜੋ ਸਹੀ ਜੀ ਸੁਖੀ ਹੋ ਜਾਂਦਾ ਸਦਾ ਸੁਖ ਪ੍ਰਾਪਤ ਹੋ ਜਾਂਦਾ ਪਾਂਸਾ ਕਰ ਤੋਂ ਪਾਰ ਹੋ ਜਾਂਦਾ ਜੋ ਉਹ ਇਹ ਨਿਰਵਲ ਰਸਨਾ ਅੰਦਰੋਂ ਪਰਤੀ ਹੁੰਦਾ ਆ ਸਾਗਰ ਤੋਂ ਬਾਹਰ ਜਾ ਕੇ ਪੀਉਂਦਾ ਅੰਦਰ ਹੁੰਦਾ ਹੀ ਨਹੀਂ ਉਹ ਨਿਰਵਲ ਰਸਨਾ ਪਾਪ ਸਾਗਰ ਦੇ ਵਿੱਚ ਨਾ ਰਸਨਾ ਨਿਰਵਲ ਹੁੰਦਾ ਨਹੀਂ ਆ ਦਾ ਇਥੇ ਅਮਰਕੁਸ਼ਤ ਪਾਪ ਸਾਗਰ ਸਾਰਾ ਮਿਰਚੂ ਦਾ ਖੰਡਾ ਹੈ ਇਹ ਤਾਲਵਾਸ ਹੈ ਇਥੇ ਅਮਰਕਿਵੇਂ ਹੋ ਜੂਗਾ अब ਲੇ ਤਾਂ ਬਹਾਰ ਹੈ ਬਾਹਰ ਜਾ ਕੇ ਹੀ ਪੀ ਹੁੰਦਾ ਹੈ ਬਾਹਰ ਜਾਣ ਵਾਸਤੇ ਜਿਹੜੀ ਬੁੱਤੀ ਆ ਉਹਨੂੰ ਨਿਰਮਲ ਹੋਣਾ ਪੈਂਦਾ ਬਲੀਤਾ ਇੱਥੇ ਰੱਖਣੀ ਪੈਂਦੀ ਹੈ ਪਾ ਜਿਹੜੀ ਸਾਰੀ ਬਲੀਤਾ ਟੋਟਲ ਹੋ ਗਈ ਸਾਰੀ ਬਲੀਤਾ ਮਾਇਆ ਚ ਆਇਆ ਤਾਂ ਉੱਪਰ ਉੱਠ ਕੇ ਬਲੀਤਾ ਧੋ ਕੇ ਸਰ ਸਰਦਾ ਫਿਰਦਾ ਹੁੰਦਾ ਜੀ ਉਹ ਸਾਸ ਅੱਲਾ ਹੁੰਦਾ ਜੀ ਉਹ ਐਵੇਨਿਊ ਤੋਂ ਪਤਾ ਸਾਗਾ ਪਾਣੀ ਕਿਵੇਂ ਨਾ ਆਇਆ ਉਹ ਪਾਉ ਹੈ ਬੋਰੀ ਹਾਂ ਉਹਦਾ ਉਹਦਾ ਉਹਦਾ ਫਿਰ ਉਹਦਾ ਛੱਕਿਆ ਕੰਮ ਕਰਨਾ ਉਹਦਾ ਦਾਖਲਾ ਹੀ ਹੈ ਸਕੂਲ ਤੇ ਉਹਨ ਦਾ ਦਾਖਲਾ ਹੈ ਸਰ ਜੀ ਹਾਂ ਜੈਨੋ ਪੇਖ ਰੰਗ ਸਾਥ ਸੰਗੀ ਦਿਨ ਸੇ ਸਭ ਸੰਗੋ ਐਨੋ ਪੇੜ ਸਾਹ ਦਾ ਰੰਗ ਜਿਹੜਾ ਧਾਕੋ ਦਾ ਰੰਗ ਪਰ ਉੱਥੇ ਅੱਖ ਕੋਲ ਵੀ ਇੰਦਰ ਨਹੀਂ ਨੈਣ ਫੋਲਦੇ ਖਾਦੀ ਨਹੀਂ ਕੋ ਲੋਕ ਜਦ ਠਿਕ ਕੋ ਲੋਕ ਜਦ ਬਾਹਰ ਸਰੀਰੇ ਹੁੰਦਾ ਉਹ ਜਿਹੜੀ ਨਰਮ ਰਸਨਾ ਹੋਈ ਨਾ ਨਾ ਜੇ ਦੇਖੂ ਨੀ ਅਵਦ ਕਮੇ ਪੀਰੂ ਅੰਨੇ ਨੂੰ ਕੋਈ ਫਲਾਊਗਾ ਨਰਮ ਲਸਨਾ ਅੰਬਰ ਪੀਓ ਸਦਾ ਸੇ ਲੈ ਲੈ ਜੀਓ ਮੈਨੂੰ ਪੇਟ ਸਾਫ ਹੋ ਜਾਦਾ ਹੈ ਜਦੋਂ ਅੰਬਰ ਪੀ ਲਿਆ ਖੁੱਲ ਜਾਣੀ ਹੈ ਫਿਰ ਉਹ ਸਿੱਧੀ ਜਾਣੀ ਹੈ ਰੋਗੇ ਹੋ ਜਾਣੀ ਹੈ ਖੁੱਤੀ ਹੋਵੇ ਹੋਈ ਆਖੋਦੀ ਦੁੱਧ ਕੋ ਕਰਕੇ ਸੇ ਦਾ ਪਤਾ ਲੱਗ ਜਾਏਗਾ ਸੇ ਦਰਸ਼ਨ ਹੋਣਾ ਸੱਚਾ ਗੋਦਾਰਨ ਕਾਂ ਦੇ ਸੁਣਾਏ ਸਾਧ ਸੰਗੀ ਬਿਰਸੇ ਸਭ ਸੰਗ ਸਾਧ ਸੰਗੀ ਬਿਰਸੇ ਸਭ ਕੋਈ ਆਪਣਾ ਕੋ ਸੱਜਣਾ ਔਰ ਸੱਜਾ ਦਾ ਸੰਸਾਰ ਵੀ ਛੁੱਟ ਜਾਂਦਾ ਛੁੱਟ ਗਈ ਸੰਸਾਰੀ ਛੁੱਟ ਗਈ ਸੰਸਾਰੀ ਸਾਰੇ ਸੰਗ ਛੱਡਿਆ ਸਾਧ ਸੰਗੀ ਬਿਰਸੇ ਸਭ ਸੰਗ ਛੁੱਟਿਆ ਹੀ ਨਹੀਂ ਫਿਰ ਦਸ ਗਿਆ ਤੁਹਾ ਹੋਤੀ ਜਾਂ ਫਿਰ ਤੁਨਾ ਹੋਤੀ ਜਾਂ ਜਿੱਦ ਅਲਾਹੀ ਹੈ ਜੋ ਮਨ ਦੇ ਵਿੱਚ ਬਨਾਉ ਸ੍ਰੀ ਖਤਮ ਹੋਊਗਾ ਬਨਾਉ ਦਾ ਹੀ ਨਾਸ ਹੋਇਆ ਉਹ ਵੀ ਕੋਈ ਨਹੀਂ ਬਨਾਉ ਦੇ ਹੀ ਮੇਰਾ ਮੇਰਾ ਹੈ ਜੀ ਸਾਰੇ ਮੇਰੇ ਨੇ ਨਾ ਦੋ ਗਲਤ ਸੀ ਮੇਰਾ ਮੇਰਾ ਹੈ ਜੀ ਇਹਦਾ ਸਾਰੀ ਕੋਈ ਨਹੀਂ ਖਬਰ ਨਹੀਂ ਹੀ ਨਹੀਂ ਖੁਦਾਨਾ ਬੜ ਜਿਹਦਾ ਹੈ ਸੀ ਉਹ ਭਰੇ ਆ ਸਭ ਉਹ ਭਰੇ ਹੋਏ ਉਹ ਬਗਾਨਾ ਬਣ ਦਿਸਰਿਆ ਮਰਿਆ ਨਾ ਹੋਇਆ ਉਹਦਾ ਹੀ ਹੋਇਆ ਔਗਲਾਂ ਦਾ ਹੀ ਨਾਸ ਹੋਣਾ ਗੁਲਾਂ ਦਾ ਵੀ ਹੁਣ ਜਿਹੜੇ ਜਿਹੜੇ ਤਜ਼ਾ ਕਰਦੇ ਨੇ ਨਾ ਉਹ ਚੀਜ਼ ਦਾ ਨਾਸ ਹੋਣਾ ਔਬਨ ਫਰਕ ਪਾ ਰਹੇ ਆ ਮੇਰਾ ਹੈ ਮੇਰਾ ਹੈ ਇਹ ਆਛਾ ਹੈ ਬੁਰਾ ਇਹ ਬੁਰਾ ਬੁਰਾਲਾ ਬੁਲਾਦਾ ਤੇ ਬੁਰਾ ਤਾਂ ਬੁਰਾਲਾ ਬੁਲਾਦਾ ਬੁਰੇ ਨਾਲ ਹੋਣੀ ਕਰਦਾ ਰਹੇ ਬੁਲਾਦਾ ਰੋਦਾ ਉਹਨਾਂ ਕੋਲ ਬੁਲਾ ਕਰ ਵੀ ਦਿੱਤਾ ਗੁੱਸਾ ਨਾ ਆਣਾ ਅਦਾ ਗੁੱਸਾ ਨਾ ਕਰ ਬੁਰਾ ਭਰਾਤ ਮੈਂ ਕਰ ਦੂ ਤੇਰਾ ਬੁਰੇ ਦਾ ਕਾਹ ਹੋ ਤੂੰ ਭਲਾ ਤੂੰ ਭਲਾ ਕਰ ਤੇਰਾ ਫਾਜ਼ੀ ਬਲਾ ਕਰ ਉਹਦਾ ਫਾਜ਼ੀ ਬੁਰਾ ਕਰ ਕੌੜ ਦੂਪਾ ਕੌੜਾ ਹੀ ਹੋਊਗਾ ਸੱਚ ਨਾ ਸਦਾ ਬਖਾਤਰੂ ਜੀ ਉਹ ਨੋਗੋਦ ਦਾ ਉਹਦਾ ਗੁਣ ਕਰਤਨ ਜਾਂ ਆਪਣੀ ਇਹ ਗੁਰਦਾਵਨ ਸਰਬੂਦਾ ਆਪਣੇ ਪੜਾਜੂੜੋ ਉਹਦੇ ਬਿਠਾਉਣੇ ਕੱਪ ਤਲਾ ਦਿਖ ਰਸਨ ਨੇ ਕੰਮ ਕਰਦਾ ਜੋ ਕਲ ਕਰਨੇ ਕੰਮ ਕਰ ਲੋ ਉਹਦੀ ਬਿਠਾਉਣੇ ਕਰਨਾ ਜਾਂ ਜੇ ਬਿਠਾਉਣੇ ਕਰਨਾ ਗੁਰਤਨ ਹੈ ਕਰਤਨ ਹੈ ਉਡੀਕ ਰਤਨ ਕੋਲ ਕਾਹੀਏ ਉਹਦਾ ਵਿਢਾਲ ਨੂੰ ਪੁਜਾਰੀ ਹੈ ਦੁਹਾਨੀ ਦੀ ਮਤ ਪੁਜਾਰੀ ਉਹ ਕੋਰਸ ਨੂੰ ਮੈਂ ਆਪਣੇ ਲਾਗੇ ਦਾ ਕੋਰਸ ਨੂੰ ਮੈਂ ਕੇ ਨਿ ਸਮਾਂ ਤਰੂ ਗਿਰੋ ਉਹ ਨਹੀਂ ਜੀ ਹਾਂ ਚਰਨ ਚਲੋ ਮਾਰ ਗੋਵਿੰਦ ਮਿਟੇ ਪਾਪ ਜਪੀਏ ਹਰਬਿੰਦ ਚਲਨੀ ਚਲੋ ਫਾਰੇ ਗੋਵਿੰਦ ਚੱਲਣਾ ਹਲ ਪਹਿਲਾਂ ਹਰ ਤੂੰ ਬਿੱਟੇ ਦੇ ਹਾਰ ਦੇ ਤੇ ਚੱਲਣਾ ਚਾਹੀਦਾ ਚਲੋ. ਹੁਣ ਚੱਲੋ ਵੇਖੋ ਪਹਿਲਾ ਅੱਖ ਪਿਆਰ ਹੋਈ ਆ ਦੇਖਣ ਵਾਲੀ ਕੋਈ ਨਾ ਪਹਿਲਾ ਹੋਲੀ ਜਿਆਦਾ ਧਰਮ ਨਾਲ ਰਸਨਾ ਮਾਂ ਪੀ ਲਿਆ ਪਹਿਲਾ ਹੋਲੀ ਉਹਦੇ ਅੱਜ ਭੁੱਲੀ ਦਾ ਸੁਪਨਾ ਗਿਆ ਆਕ ਭੁੱਲੀ ਸੁਪਨਾ ਗਿਆ ਫਿਰ ਅਦਭੁਤ ਇਹ ਸੁਪਨਾ ਨਹੀਂ ਆਉਂਦਾ ਫਿਰ ਤੁਮ ਗਿਆ ਯਕ ਭੁਤ ਸੁਪਨਾ ਦੇ ਜਾਊਗਾ ਜਾਊਗਾ ਇਹ ਤਾਂ ਹੋਂਦਾ ਨਹੀਂ ਹੱਕ ਵੀ ਖੁੱਲੀ ਰਹੇ ਸੁੱਖ ਵੀ ਰਹੇ ਬਦਲ ਗਈ ਫਿਰ ਚੱਲ ਚਲੋ ਫਿਰ ਪਹਿਰਾਵਾ ਚੋ ਸੁਣਾ ਫਿਰ ਸੂਰ ਫਿਰ ਪੈਰਾਂ ਨਾਲ ਚੱਲਣ ਦਾ ਸਮਝ ਆਊਗੀ ਕਿ ਕੀ ਹੁੰਦਾ ਤੇ ਦੇਖੂਗਾ ਯਾਰ ਫਿਰ ਚੱਲਣ ਦੇਖਣ ਲੱਗੋਗੇ ਫਿਰ ਪੈਰਾਂ ਚੱਲਣਾਂ ਦਾ ਫਰਕ ਹੋ ਜਾਊਗਾ ਫਿਰ ਪਤਾ ਲੱਗੂਗਾ ਕਿ ਪੈਰ ਕਿਉਂ ਚੱਲਦੇ ਕਿਉਂ ਨਹੀਂ ਆਂਗੜ ਦੇਖਣੇ ਆ ਘੁੱਲੀ ਤੇ ਆਂਗੜ ਦੇਖਣ ਕੇ ਇਹਦਾ ਚੱਲਣਾ ਨੂੰ ਬੈਠ ਗਈ ਹੈ ਚੱਲ ਨਹੀਂ ਚੱਲੋ ਮਾਰ ਗੋਬਿੰਦ ਬਿਟੇ ਪਾਪ ਜਪੀਏ ਹਰਬਿੰਦ ਜਪੀਏ ਹਰਬਿੰਦ ਜਿੰਨੇ ਕੁ ਘੜੀ ਦੋ ਘੜੀ ਜਿੰਨਾ ਕੋ ਜਪਣਾ ਪਾਪ ਉਹ ਨਾ ਚੱਲ ਨਹੀਂ ਰਹਿੰਦੇ ਇਹ ਤੁਹਾਡਾ ਤੁਹਾਡੀ ਮਰਜ਼ੀ ਹੈ ਜੇ ਤਾ ਸੋਖ ਰੱਖਣਾ ਜਿਦਾਂ ਜੇ ਤੁਸੀਂ ਰੋਗਿਆਂ ਨੂੰ ਮਦਰ ਜਪ ਲੋ ਜਦੋਂ ਵੀ ਲੋੜਣਾ ਹੋਵੇ ਜੋ ਬਟਾ ਪਾਪ ਜਬੀ ਹਰ ਗੰਦ ਇਹ ਤੁਸੀਂ ਘਰ ਦੋ ਇਥੇ ਆਉਂਦੇ ਸਾਨੂੰ ਸਤ ਪਾਪਣਾ ਹੋਵੇ ਆਪੇ ਡਰ ਲੱਗਦਾ ਵੇ ਯਾਦ ਰੋ ਜੇ ਸੋਦਾ ਰੋ ਜੇ ਯਾਦ ਰੋ ਇਹ ਪਾਪ ਤੋਂ ਢਲ ਲੱਗਦਾ ਫਿਰ ਦੰਦੇ ਰਹੋ ਕਿ ਆਪ ਪਾਪ ਦੇ ਗੱਲ ਨਹੀਂ ਲੱਗੂਗਾ ਜਿਉਂ ਉਹ ਤਾਂ ਨੇ ਆਖਾਂ ਜੀਵਾਂ ਵਿਚਰੇ ਮਰ ਪਾਪ ਜਿਹੜਾ ਉਹ ਤਾਂ ਹੁੰਦੀ ਹੈ ਪਾਪ ਤੋਂ ਬਹੁਤ ਹੈ ਦੁੱਖ ਹੈ ਜਿਹੇ ਦਾ ਪਤਾ ਲੱਗਦਾ ਜਾ ਕੇ ਵਿਚਰੇ ਮਰ ਜਾਉਂ ਕੀ ਹੁੰਦਾ ਪਰ ਤਾਂ ਇਹ ਲੱਗਦਾ ਨਹੀਂ ਅੱਖਾਂ ਜੀਵਾਂ ਵਿੱਚ ਰਹਿ ਮਰ ਜਾਉਂਦੀ ਹੁੰਦਾ ਇੱਥੇ ਆ ਕੇ ਬਗਲਾ ਜਣੇ ਨਾਲ ਦੀ ਸਮਝ ਆਉਣੀ ਆ ਜਾਗੇ ਤੇ ਬਸ ਫਿਰ ਸਮਝਣੇ ਜੀ ਰੋਹ ਜੂਗਾ ਸੌਂ ਗਿਆ ਮਰ ਗਿਆ ਫਿਰ ਸੁਰੂਗਾ ਭਾਈ ਫਿਰ ਰੋਹਣਾ ਜੂਰੋ ਜੂ ਤਾਈਆਂ ਗੱਲ ਕੀਤੀ ਉਹਨਾਂ ਮਨ ਹੁੰਦਾ ਜਦ ਹੀ ਲੱਗ ਜਾਂਦੀ ਹਾਂ ਜਿਹਦੇ ਟੋੜ ਲੱਗ ਜਾਈਂ ਅਹਨੇ ਦਾ ਲੱਗੂਗੀ ਉਰਪਦਾ ਗਿਆ ਦੂਸਰੇ ਵਾਰ ਆ ਸਚਾਪੋ ਜੀ ਜੀ ਹਾਂਜੀ ਕਰ ਹਰ ਕਰਮ ਸਰਬਣੀ ਹਰ ਕਥਾ ਹਰ ਹਰ ਹਰਦਰ ਗਏ ਨਾਨਕ ਉੱਜਲ ਮਸਾ ਕਰ ਹੱਥਾਂ ਨਾਲ ਹੋਣਾ ਕਰਮ ਕਾਰਨ ਨਾਲ ਹੋਣਾ ਬਾਲੇ ਸਨ ਦੇਖੋ ਬਾਲੇ ਮਾਇਆ ਦੇ ਮਾਇਆ ਦਾ ਕੰਮ ਹੋਊਗਾ ਬਾਲੇ ਮਾਇਆ ਦੇ ਸਰੀਰ ਦੇ ਨੇ ਇਹ ਇਹਦੇ ਵਾਸਤੇ ਕੰਮ ਹੋਊਗਾ ਕਰ ਜਲੇ ਤਾਂ ਲੈਣੇ ਜੋ ਕੁਝ ਕਰਨਾ ਆਇਆ ਹੈ ਆਇਓ ਲਾਹ ਲੈਣ ਉਹ ਲਾਹ ਲੈਣ ਜੀ ਜੋ ਇਹ ਬਰਦਾ ਕਰ ਹਰ ਕਰ ਹਰ ਹਰ ਕਾਰ ਸਰਬ ਨੂੰ ਵੀ ਆ ਗਿਆ ਹਾਂ ਹਰ ਵਾਲੇ ਕਰ ਕਰ ਤੋਂ ਮਨ ਵਾਲੇ ਕਰ ਬਣਦਾ ਕਰਕੇ ਹਰ ਕਾਰ ਕਰ ਮਨ ਦਾ ਕਰਨ ਜਰੀਦ ਦਾ ਕਰ ਉਹ ਤੇ ਛੜਾ ਕੇ ਹਰ ਕਾਰ ਕਰ ਕਰ ਹਰ ਵਾਸਤੇ ਕਰੋ ਜੋ ਹਰੂ ਕਰਨਾ ਚਾਹੀਦਾ ਹੋਗਾ ਉਹ ਝੁਕ ਕਰੋ ਹਰ ਕੇ ਕਰਮੇ ਝੁਕ ਕਰੋ ਝੁਕ ਕਰੋ ਮੰਤੇ ਕਬੂ ਹੁਣਾ ਕਰੋ ਹਰ ਦੇ ਜਿਹੜੇ ਕਰਮ ਨੇ ਝੁਕ ਕਰੋ ਤੇ ਆਪਲੇ ਕਬੂ ਨੇ ਭਲੇ ਹਰਦਾਸ ਰੂਪ ਤੇ ਹਾਂ ਜਾਰਾ ਕਰਮ ਸਰਬਣੀ ਹਰ ਕਥਾ ਸਰਬਣੀ ਹਰ ਕਥਾ ਸਰਬਣੀ ਸ੍ਰੋਤ ਕੀ ਗੱਦੀ ਹਰ ਕਥਾ ਕੁਰਬਾਨ ਕਰਮ ਕੀ ਕਰਨ ਕਾਰਨ ਇਹ ਕਹਾਣੇ ਹਰ ਕੀ ਕਥਾ ਦੀ ਸਿੱਖਿਆ ਦੋਹਾ ਵੀ ਦੇ ਹਰ ਦਾ ਕਰਮ ਹੈ ਅੱਲਾ ਕਰਨੇ ਲਈ ਮੁਕਤਰਾ ਜਾਵੇ ਕੋਈ ਉਮਰ ਹਰ ਨਾ ਕੀ ਜੀਦਾ ਰਾਏ ਤੇਰੀਆਂ ਨਾ ਕਰ ਹੀ ਜਨਾ ਉਹਦੀ ਗੱਲ ਗੁਰਬਾਨੀ ਕਹਿੰਦਾ ਨਾ ਨਾ ਕਹਦਾ ਨਾ ਕਹਦਾ ਨਾ ਕਹਦਾ ਹਰ ਇੱਕ ਮਾਰਗ ਰਸਤਾ ਹੈ ਉਹ ਦੱਸਣ ਦਾ ਕਰਤਾਰ ਸਰਵਾਂ ਨੇ ਕਹਿਣਾ ਹਰ ਕਥਾ ਸੁਣ ਕੇ ਹੀ ਤਾਂ ਹਰ ਕੀ ਕਥਾ ਸੁਣਾਊਗਾ ਹਰ ਕਥਾ ਕਹਾਣੀਆਂ ਕੋਈ ਵੀ ਨਹੀਂ ਹਾਂਜੀ ਕਰ ਹਰ ਕਰਮੋ ਸਰਬਨ ਹਰ ਕਥਾ ਹਰ ਦਰਗਾਹ ਨਾਲ ਕੋ ਜੁਲ ਮਥਾ ਇਹ ਕੀ ਕਹ ਕਰੇ ਤਾਂ ਜਿਹੜਾ ਤੇਰਾ ਹੱਸੀ ਦਰਗਾਹ ਦੇ ਵਿੱਚ ਬਹੁਤ ਉਜਲ ਹੋ ਜੂਗਾ ਮਥਾ ਮਾਣੇ ਮਨ ਦਾ ਇਹ ਸਲੰਕ ਕਰ ਕੋਈ ਟਕ ਟਕ ਕੋਈ ਵੀ ਕਾਉ ਦੂਰ ਉਜਰ ਬਥ बुजेल मत बूरे मान होता है पीछे घुसती है बूरे मान पानी का रना श्री 예수 देख मंचा था सां जो हूं खड़ा सां को बैठा पखे बोल हमें जरूरत है बूरे ਪੁਰਾਣੇ ਮੁਰਲਾਗਦੇ ਜਾਂਦੇ ਪਿਛੇ ਕਹਿੰਦੇ ਵੀ ਜਾਨ ਨੂੰ ਦਵਾਜੀ ਪੁਰਾਣੇ ਵੀ ਉਂਡੂ-ਕੂੜੇ ਅੰਦਰ ਹੀ ਲਾਗੇ ਪੂਰੇ ਜਾਂ ਅਗਲੇ ਰਾਜਾ ਅਗਰ ਪੂਰੇ ਜਗਤ ਵਿੱਚ ਚਾਹੇ ਨਹੀਂ ਵੀ ਇੱਕ ਬੰਦੇ ਆਇਆ ਕਿੰਨਾ ਹੀ ਹੋ ਗਿਆ ਪਰ ਅਦਵਾ ਨਹੀਂ ਗਿਆ ਇਸ ਇੱਕ ਵਾਰ ਪੇਸ਼ ਕਰ ਦਣਾ ਫਿਰ ਜੋ ਫਰਦੀ ਹੋਗੀ ਅਰਾਧ ਦੇ ਘੱਡੇ ਨਾਲ ਚੱਲੇ ਉਹਨਾਂ ਪੁਰਸ਼ਾਂ ਦਾ ਇੱਕ ਵਾਰਾ ਰਾਜੂ ਨੇ ਪੇਸ਼ ਕਰਦਾ ਹੈ ਜਾ ਕੇ ਇਹ ਆ ਗਾ ਬੋਲੀਆ ਬਾਬੋ ਜੀ ਬੋਜੂ ਜੀ ਜੜ ਦੋ ਬੜੀ ਕਰਦਾ ਜਮਨ ਜੀ ਉਹ